ਤੇ ਲੋਕ ਮਹੱਲਾ ਪੰਜਵਾ ਵਿਛੋਹੇ ਜੰਬੂਰ ਖਵੇ ਨਾ ਵੰਜਣ ਗਾਖੜੇ ਜੇ ਸੋ ਧਣੀ ਮਿਲਨ ਨਾਨਕ ਸੁਖ ਸੰਬੂ ਸਤ ਜੇ ਜੰਬੂਰ ਦੇ ਵਿੱਚੋਂ ਵਿਛੜ ਗਏ ਜਿਹੜੇ ਚੋੜੀ ਤੋਬ ਦੇ ਡਾਲੇ ਵਿੱਚੋਂ ਡਿਗਲ ਗਏ ਨਾ ਜੰਬੂਰ ਦੇ ਵਿੱਚੋਂ ਹਾਂਜੀ ਗੁਰੂ ਘਰ ਤੇ ਫਾਇਰ ਹੋ ਗਿਆ ਉਜੋ ਦਾ ਵਿਛੜ ਗਏ ਨਗਰੇ ਦੇ ਬਾਹਰ ਨਿਕਲ ਗਏ ਨਾ ਉਹ ਕਿਹਦਾ ਵਿਛੋੜ ਤੇ ਵਿਛੋਏ ਜੱਬੂਰ ਖਵੇ ਜਿਹਨਾਂ ਨੇ ਖੋ ਗਏ ਜਾ ਕੇ ਜਿਹਨਾਂ ਦੇ ਵੱਜ ਗਏ ਜਾ ਕੇ ਨਾ ਹੋ ਜਾਣ ਫੇਰ ਮੇਰੋ ਜਾਂਦੇ ਨਹੀਂ ਵੱਜਦੇ ਤਾਂ ਚਲ ਬਹੁਤ ਔਖੇ ਤੁਰਦੇ ਤੁਰ ਨਹੀਂ ਸਕਦੇ ਹੋ ਚੱਲ ਨਹੀਂ ਸਕਦੇ ਖਕਵੇਂ ਕਰ ਦਿੰਦੇ ਨੇ ਉਹਨਾਂ ਨੂੰ ਸੌਖੇ ਦੀ ਨੇ ਉਹਨਾਂ ਨੂੰ ਸੌਖਾ ਨਹੀਂ ਜਾਣ ਦਿੰਦੇ ਸੌਖਾ ਦਾਤਰਾ ਉਹ ਖਾ। ਅਸਰ ਬਿਛੋਹੇ ਦਾ ਭਾਵ ਕੀ ਹੈ ਜੀ ਵਿਛੜੇ ਹੋਏ। ਜਦ ਫੈਰ ਹੋ ਗਿਆ ਵਿਛੜੇ ਗਏ ਜੀ ਮੂਰਤੋਂ ਤਾਂ ਆਇਆ ਜੰਬੂਰ ਤੋਪ ਹੁੰਦੀ ਐ ਜੀ। ਤੋਪ ਨੇ ਜਦ ਫਾਇਰ ਕਰਤਾ ਜਿਹੜੇ ਦਾੜ ਦੇ ਉਹ ਤਾਂ ਵਿਛੜ ਗਏ ਜਿਨ੍ਹਾਂ ਆਪਾਂ ਛਰਰੇ ਕਹਿੰਦੇ ਹਾਂ ਜੀ ਜੰਬੂਰ ਚੋਂ ਤਾਂ ਵਿਛੜ ਗਏ ਉਹ ਹਾਂਜੀ ਚੱਲ ਗਏ ਉਤੋਂ ਤਾਂ ਜੀਦੇ ਗਾਹਾਂ ਖਵੇ ਜੀ ਇਹ ਖੁੱਭ ਕੇ ਜਾ ਕੇ ਹਾਂਜੀ ਉਹਨੂੰ ਸੋਖਾਣੇ ਸੌਣ ਦਿੰਦੇ ਫਿਰ ਉਹਨੂੰ ਸੋਖਾਣੇ ਤਾਂ ਉਹ ਜਣਾ ਨਵੰਜਣ ਕਾਖੜੇ ਹਾਂ ਕਾਖੜੇ ਉਹ ਆਖਾ ਕਰ ਦਿੰਦੇ ਬੁਸ਼ਕੇ ਵਰਦ ਜੀ ਪਾਣੀ ਵਰਦ ਜੀ ਠੀਕ ਹੈ ਜੀ ਉਹ ਸਹਿਣੇ ਔਖੇ ਨੇ ਜਿ ਦੇ ਡਾਲੇ ਸਹਿਣੇ ਔਖੇ ਨੇ ਜੇ ਬੂਧ ਦੇ ਨਾਲ ਜਾ ਕੇ ਜਨ ਬਣਦੇ ਨੇ ਕਿਸੇ ਨੂੰ ਇਹ ਵੀ ਤਾਂ ਬਣਦੇ ਹੀ ਨੇ ਹਾਂਜੀ ਕਿਸੇ ਦੇ ਸਰੀਰ ਚ ਜਾ ਕੇ ਬਣਦੇ ਨੇ ਇਹਦਾ ਸੰਵਾਦ ਦਿੰਦੇ ਨੇ ਹੂੰ ਪਰ ਜਿਹੜੀ ਆਤਮਾ ਜਾ ਕੇ ਆਪਣਾ ਮੂਰਤੀ ਬਣਦੀ ਹੈ ਸੁਖੀ ਬਸਦੇ ਨੇ ਉੱਥੇ ਸੁਖੇ ਹੋਵੇ ਬਲੇ ਨੇ ਬਲੇ ਹੋਏ ਸੁਖੀ ਨੇ ਵਿਚੜੇ ਹੋਏ ਦੁਖੀ ਹੂੰ ਹੂੰ ਹੋਏ ਜਾ ਕੇ ਲੋਕਾਂ ਨੂੰ ਦੁੱਖ ਦਿੰਦੇ ਨੇ ਆਪ ਤਾਂ ਛੋੜੇ ਦਾ ਦੁੱਖ ਹੀ ਆ ਕਾਹ ਵੀ ਸੁੱਖ ਨਹੀਂ ਦਿੰਦੇ ਕਿਸੇ ਨੂੰ ਦੇ ਸਕਦੇ ਹੋ ਵਿਛੜੇ ਹੋਏ ਨੇ ਆਤਮਾ ਨੂੰ ਪਰ ਕੇ ਆਈ ਹੋਈ ਜੋ ਇਹ ਦੇ ਸਕਦਾ ਕੋਈ ਸੁੱਖ ਤਾਂ ਦੇ ਸਕਦਾ ਦੁਆ ਦੁਆ ਹੀ ਨੂੰ ਦੁੱਖ ਦੇ ਹੀ ਰਹੇ ਜਿਹੜਾ ਜਿਹੜੀ ਚੀਜ਼ ਨੂੰ ਖਾਂਦਾ ਉਹਨੂੰ ਦੁੱਖੇ ਦਿੰਦਾ ਸੁੱਖ ਤਾਂ ਦਿੰਦਾ ਨਹੀਂ ਕੋਈ ਕਿਸੇ ਨੂੰ ਇਹ ਸੁੱਖ ਸਾਗਰ ਔਰ ਪਾਪ ਸਾਗਰ ਦੀ ਗੱਲ ਹੈ ਠੀਕ ਹੈ ਕਿਤੇ ਸਾਰੇ ਵਿਛੜੇ ਹੋਏ ਨੇ ਉਹ ਜਬੂਰ ਤੋਂ ਚੱਲ ਗਏ ਉਧਰੋਂ ਚੱਲ ਗਏ ਇੱਥੇ ਆ ਗਏ ਖੜ ਕੇ ਆ ਗਏ ਵਿਖਰ ਗਏ ਸੁਖੀ ਤੋਂ ਆਏ ਲੋਕਾਂ ਨੂੰ ਪਰਮੈਸ਼ਰ ਦਾ ਦਿਆਲੂ ਆ ਕਿਰਪਾਲੂ ਹੋਏ ਨਹੀਂ ਕੁਝ ਬੁਰਾ ਆਪੇ ਬੁਰਾਈਏ ਤੇ ਆਈ ਕਿੱਥੋਂ ਆ ਜਦੋਂ ਚਾਰਜ ਹਾਂਜੀ ਉਹ ਫਾਇਦਾ ਸੀ ਕਿ ਬੁਰੇ ਆ ਇਕ ਦੂਏ ਵਾਸਤੇ ਹਾਂ ਜੀ ਦੁੱਖ ਕਿੱਥੋਂ ਆਏ ਅਸੀਂ ਉਹ ਦੱਲੇ ਆ ਇੱਕ ਦੂਏ ਨੂੰ ਦੁੱਖ ਠੀਕ ਹੈ ਜੀ ਭਵ ਸਾਗਰ ਸੁਖ ਸਾਗਰ ਦੀ ਗੱਲ ਦੇ ਵਿੱਚ ਜਾ ਕੇ ਸੁਖ ਸਾਗਰ ਦਾ ਸੱਚ ਦੇ ਸੰਭੂ ਦੇ ਵਿੱਚ ਮਿਲ ਗਿਆ ਜਾ ਕੇ ਸੱਚ ਨੂੰ ਜਿਹੜਾ ਮਿਲ ਗਿਆ ਸੁੱਖੇ ਸੁੱਖ ਆ ਗਿਆ ਜਿਹੜਾ ਵਿਛੜ ਕੇ ਵਿਛੜ ਕੇ ਫੈਲ ਵੀ ਜਾਂਦਾ ਨਾ ਹਾਂਜੀ ਉੱਤੇ ਮਿਲ ਜਾਂਦਾ ਇੱਥੇ ਵਿਛੜੇ ਹੋਏ ਫੈਲੇ ਹੋਏ ਨੇ ਤੁਹਾਡੇ ਕੋਈ ਅਫਰੀਕਾ ਕੋਈ ਅਫਰੀਕਾ ਕੋਈ ਕਿਤੇ ਕੋਈ ਕਿਤੇ ਬਾਰੇ ਖੜਾ ਪਹਾੜਾਂ ਤੇ ਕੁਦਰਿਆਵਾਂ ਤੇ ਕਨਾਲੇ ਤੇ ਕੋਈ ਸਬੂਤਰ ਤੇ ਖੜਾ ਹੁੰਦੇ ਸਾਰੇ ਖੜਾ ਸਾਨੂੰ ਹਾਂਜੀ ਚੱਲਿਆ ਕੋਈ ਕੋਈ ਕਰੇ ਅੱਜ ਸਾਰੇ ਠੀਕ ਹੈ ਜੀ ਕਿਹੜਾ ਸੁਲਾਬ ਹੈ ਉਹ ਸੁਖੁ ਖੁਸ਼ ਸੁਖ ਸੁਲਾ ਪੰਜਮੀ ਬਸੰਦੀ ਪਾਣੀ ਹੈ ਕੇੰਦਨ ਰੱਖੇ ਭਾਏ ਨਾਨਕ ਸੋ ਸੋ ਆਏ ਜਾਂਕੇ ਆੜਲ ਅਬ ਜਿਆਦਾ ਦੇ ਜਿਆਦਾ ਪਾਣੀ ਨੂੰ ਰਖ ਰਦੀ ਹੈ ਆਪਣੇ ਉੱਤੇ ਅੱਛਾ ਜੀ ਕੀ ਆ ਪਾਣੀ ਦੇ ਉੱਤੇ ਜਮੀਰ ਟਿਕ ਸਕਦੀ ਹੈ ਹਮਮ ਭਾਲੇ ਰੋਪਿਆ ਤੇ ਕੀ ਲਿਆ ਪਾਣੀ ਮੱਟੀ ਐ ਮੈਂ ਸਾਪਣੇ ਪਿੱਛੇ ਰੱਖਦਾ ਮਿੱਟੀ ਰੂੜੀ ਪਾਣੀ ਸਰਦਾ ਕਦੇ ਵੀ ਕਿੰਨਾ ਤੁਸੀਂ ਇਹਨੂੰ ਫਿਲਟਰ ਕਰ ਲੋ ਮਿੱਟੀ ਰੂੜੀ ਸਰਦਾ ਹਮ ਕੀ ਪਾ ਹੋ ਗਏ ਵੀ ਪਾਣੀ ਉੱਤੇ ਆਪ ਵੀ ਜਿਹੜੀ ਜ਼ਮੀਨ ਦੇ ਵਿੱਚ ਆਖਾਨ ਦੇ ਵਿੱਚ ਮਿੱਟੀ ਹੈ ਉਹ ਵਿੱਚ ਸੁਭਿਲ ਜਾਂਦੀ ਹੈ ਕਾਇਦੇ ਵਿੱਚ ਬਿਟੀ ਉੱਡਦੀ ਹੈ ਕੀ ਕਰ ਠੀਕ ਹੈ ਇੱਕ ਚੀਜ਼ ਇੱਕ ਚੀਜ਼ ਨੂੰ ਰੱਖ ਸਕਦੀ ਹੈ ਸਮਾਣ ਸਕਦੀ ਹੈ ਜਣ ਜੀ ਠੀਕ ਹੈ ਇੱਕ ਚੀਜ਼ ਦੇ ਵਿੱਚ ਦੂਈ ਚੀਜ਼ ਰਹਿੰਦੀ ਐ ਪਾਣੀ ਹੈ ਇੰਦਨ ਰੱਖੇ ਪਾਏ ਰੱਖ ਸਕਦੇ ਹੋਰ ਕੁਝ ਨਹੀਂ ਰੱਖ ਸਕਦਾ ਹਾਂਜੀ ਲੱਕੜ ਸਮਝ ਲਓ ਹਾਂ ਕਿਸੇ ਤਰ੍ਹਾਂ ਦਾ ਵਿੰਦਨ ਉਹਦੇ ਅੰਦਰ ਅੱਗ ਛੁਪੀ ਹੁੰਦੀ ਹੈ ਜੀ ਹਾਦਰ ਨੂੰ ਸਹਾਰਾ ਦੇ ਸਕਦਾ ਠੀਕ ਹੈ ਨੂੰ ਨਿਵਾਸ ਦੇ ਸਕਦਾ ਠੀਕ ਹੈ ਜਿਮੀ ਆਪਣੇ ਪਾਣੀ ਨਿਵਾਸ ਦੇ ਸਕਦੀ ਹਾਂ ਹਨ ਕਿਸੋ ਸੋ ਆਹ ਜਾ ਦੇ ਵਿੱਚ ਜਮੀਨ ਵਿੱਚ ਅਕਾਸ਼ ਵਿੱਚ ਮਿੱਟੀ ਵਿੱਚ ਅੱਗ ਸਭ ਕਾ ਜਨਮ ਨਵਾਸ ਤੇ ਠੀਕ ਹੈ ਜੀ ਪਾਣੀ ਨੂੰ ਪਿਤਾ ਗਿਆ ਹੋਇਆ ਪਰ ਨਵਾਸ ਦੀ ਜਰੂਰਤ ਹੈ ਸਰ ਫਿਰ ਸਾਰੇ ਨੂੰ ਨਵਾਸ ਇਹ ਕਿ ਗਈ ਹੈ ਠੀਕ ਹੈ ਜੇ ਨੂੰ ਪਿਤਾ ਗਈ ਤਾਂ ਛੋਟੀ ਗੱਲ ਹੈ ਪਿਤਾ ਹੀ ਹੈ ਜਦਾ ਸਭੀ ਨੂੰ ਵੀ ਕਹਤਾ ਤਵਾਰ ਨੂੰ ਆਸਰਾ ਦੋ ਆਗ ਪਾਣੀ ਤੋਂ ਉਲਟ ਹੈ ਪਾਣੀ ਆਗ ਤੋਂ ਉਲਟ ਸਾਰੇ ਇਕੱਠੇ ਰੱਖ ਸਕਦਾ ਆਪਾ ਵਿਰੋਧੀ ਆਪਾ ਵਿਰੋਧ ਅਬਰ ਦਾ جہਨ ਨੂੰ ਆਪਣੇ ਵਿੱਚ ਸੁਮਾ ਚੰਦਾ ਦੋਹਾਂ ਨੂੰ ਖਾ ਚਿਵਲੀ ਨਾਲ ਰੱਖ ਲਈ ਸੀ ਖੰਡ ਜਿਵੇਂ ਅਬਰ ਤੋਂ ਨਹੀਂ ਰੱਖ ਸਕਿਆ ਤੇ ਹੋ ਗਿਆ ਐ ਲੱਗ ਨਹੀਂ ਬੜੀ ਬੜਾਈ ਕਰਦੇ ਨੇ ਗਿਆ ਉਹ ਅਬਰ ਸਾਰਾ ਹੀ ਇਕੱਠਾ ਕਰ ਦਿੰਦਾ ਲੱਖਣ ਨਵਤੇ ਜਿਵ ਜੀ ਨੂੰ ਵਿੱਚ ਟੰਡ ਚ ਰੱਖਣ ਤਾਂ ਵਿੱਚ ਤੇਰੇ ਕੀਤੇ ਕੰਮ ਤੁਦੈ ਗੋਚਰੇ ਸੋਈ ਵਰਤੈ ਜੱਗ ਜੇ ਕੀਆ ਤੁਦ ਤੁਰੇ ਲਖੋ ਜਿੱਤੀਆਂ ਹੁਕਮ ਬਿਲੋਸਪੀ ਦੇ ਵਿੱਚ ਜਿੱਤੀਆਂ ਗੱਲਾਂ ਆਈਆਂ ਸਭ ਤੋਂ ਇੰਪੋਰਟੈਂਟ ਪੰਕਤੀ ਆ ਤਬ ਤੋਂ ਜ਼ਿਆਦਾ ਇਪੋਰਟਡ ਪੁਕਤੀ ਹੈ ਐ ਸਪਸ਼ਟ ਹੈ ਕਿ ਜਿਹੜੇ ਤੇਰੇ ਕੀਤੇ ਹੋਏ ਕਾਬੂ ਦੇ ਕਾਬੂ ਹਾਂ ਜੀ ਪੇਰੇ ਗੋਚਰੇ ਤੇਰੇ ਗੋਚਰੇ ਨੇ ਤੁਹਾਡਾ ਹੀ ਗੋਚਰੇ ਉਹਨਾਂ ਜੋਰ ਕੋਈ ਕੋਈ ਦਗੰਦੀ ਦੇ ਸਕਦਾ ਉਹ ਤੇਰੇ ਗੋਚਰੇ ਐ ਤੇ ਤੈਨੂੰ ਕਰਵਾਉਣ ਤੂੰ ਵੀ ਸਮਾਰ ਸਕਦਾ ਹੈ ਸੱਚ ਹੈ ਉਹਦਾ ਕੰਟਰੋਲ ਹੈ ਔਰ ਕਿਸੇ ਦੇ ਪਿੱਛੇ ਦੇ ਕਿਹੜਾ ਕੰਟਰੋਲ ਹੈ ਬ੍ਰਹਮਾ ਨਾਲ ਬਿਸ਼ਨੂ ਨਾਲ ਚਿਉਂਜੀ ਨਾਲ ਗਿਰਦਾ ਨਾਲ ਜੇਦਾ ਨਾਲ ਜੇਦਾ ਗੋਚਰੇ ਤੋਂ ਸੈਕੰਡ ਪਰਸਨ ਕੋ ਡਿਊਟੀ ਵੀ ਐਕਸਰ ਕਭ ਤੂੰ ਸਾਵਣੀ ਮੇਰਾ ਵੰਡ ਕੇ ਨਹੀਂ ਦਿੱਤੇ ਕਬ ਜਿਹੜੇ ਇਹਨਾਂ ਨੇ ਵੰਡਤੇ ਨਾ ਤਿੰਨ ਸਾਨੂੰ ਸਾਬੂ ਇੱਕ ਪਾਸੇ ਰੱਖਤੇ ਥਾਲੀ ਚ ਆਲਗੇ ਪੂਜਾ ਕਰ ਲਿਆ ਫਿਰ ਹਲਦ ਤਾਂ ਹੀ ਥਾਲੀ ਜੀ ਦੇ ਪਾਗਿਆ ਨਾਲ ਰੱਖੇ ਪੂਜਾ ਜੀ ਕਰਦੇ ਨੇ ਪਾਣੀ ਪਾ ਕੇ ਰੱਖਦੇ ਤੇਰੇ ਗੋਚਰੇ ਤੇਰੀ ਉੱਚੇ ਸ੍ਰਿਸ਼ਟੀ ਤੈਨੂੰ ਕੀਤੀ ਹੈ ਤੇਰੇ ਗੋਚਰੇ अच्छा पेड़ पौधे तैन पैला जीते तेरे, तेरे गो चिरे द। दया पैला जीते तेरे गो चिरे द। उली फांद ना करे आज बलिया होगा। अच्छा जी, ये तेरे पर इथे परमेश्वर दी ਤੋ ਰੌਫਰਵਾਨ ਤੇ ਕਰ ਦਿੱਤਾ ਉਹੀ ਵਰਤੇ ਉਹਨੂੰ ਕੋਈ ਰਾਹ ਵਿੱਚ ਬੋਲ ਨੀ ਸਕਿਆ ਕੋਈ ਤਰਬੀਬ ਨਹੀਂ ਉਹ ਜੋ ਉਸਤੀ ਉਹ ਬ੍ਰੋਸਟਿਸ ਐ ਸਪਸ਼ਟ ਲਾਈਡ ਐਦੋਸ ਕੋਈ ਨਹੀਂ ਠੀਕ ਹੈ ਬਿਸਮ ਭਏ ਬਿਸਮਾਦ ਦੇਖ ਕੁਦਰਤ ਤੇਰੀਆਂ ਚਰਨ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀਆਂ ਇਸੇ ਸਰਕੇ ਦਾ ਬਿਸਮ ਇਹ ਬਿਸਵਾਦ ਬਿਸਪਸੀ ਜਿਹੜੇ ਨਾ ਪਹਿਲਾਂ ਬਿਸਮ ਤੇ ਗੁਰ ਅੱਲਾ ਵਦਿਆ ਹੋਇਆ ਸੀਗਾ ਪਰ ਜ਼ਰੂਰ ਵੀ ਹੁੰਦਾ ਹੋਇਆ ਕੀਤਾ ਪਰ ਪੂਰਾ ਭਰੋਸਾ ਦੀ ਸੀ ਜਦ ਪੂਰਾ ਦੇਖ ਲਿਆ ਕੁਦਰਤ ਦੇ ਵਿੱਚੋਂ ਵੀ ਹਾਂ ਉਹੀ ਹੁੰਦਾ ਜੋ ਕਰਦਾ ਬਿਸਮਾਤ ਹੋਵੇ ਜੋ ਬੇਸਮਾਨ ਕਹੇ ਬਿਸਮਾਤ ਕਿ ਚਲੇ ਇਹ ਤਾਂ ਬਿਲਕੁਲ ਏ ਸੱਚੀ ਗੱਲ ਹੈ ਜਈ ਹੋਇਆ ਉਹ ਕਰਦਾ ਆਖਰੀ ਪਰਦੇ ਦਾ ਪਰਦਾ ਜਦ ਲਾਹ ਹੁਦਦਾ ਬਿਸਮਾਤ ਹੋ ਜਾਂਦਾ ਜਿੰਨਾ ਜਿਹੜੇ ਕੋਈ ਪੜਦਾ ਰਹਾ ਉਹਨਾਂ ਜਰ ਬਿਸਮੂਦ ਹੁੰਦਾ ਫਿਸਬੂਦ ਕਿਸਮੂ ਬਿਸਮੂ ਭਏ ਬਿਸਮਾਤ ਫਿਰ ਬਿਸਮਾਤ ਹੋ ਗਿਆ ਉਦੋਂ ਤੋਂ ਦੇਖੇ ਕੁਦਰਤ ਕੋਈ ਜੋ ਹੋ ਰਿਹਾ ਤਾਂ ਕੁਦਰਤ ਹੈ। ਜੋ ਹੀ ਵਰਤੇ ਜੱਗ ਕੁਦਰਤ ਕੁਦਰਤ ਤੇਰਾ ਤੁਰੋਂ ਘਰਵਾਲਾ ਆਇਆ ਉਹੀ ਜੱਗ ਵਿੱਚ ਵਰਤ ਰਿਹਾ ਕੁਦਰਤ ਵਿੱਚੋਂ ਹੀ ਬੁੱਝਣ। ਉਹ ਲਿਆ। ਉਹ ਬੁੱਝ ਲਿਆ ਬਸਮਾਲ ਹੋ ਗਿਆ। ਠੀਕ ਹੈ। ਉਹ ਕਬੂਜ ਪਾਈ। ਲੋਕਿਆ ਤੈਨ ਤੁਰੇ ਜਾਂ ਤੁਰੋ ਤੈਨ ਲਿਖਿਆ ਕੋਈ ਉਸ ਜਗ ਦੇ ਵਿੱਚ ਕਿ ਜੇ ਤੁਰੂ ਸਰਬਾਣੂਤਾ ਉਹੀ ਵਰਤਦਾ ਜਿਹਨੂੰ ਇਹ ਦੇਖ ਲਈ ਹਾਂ ਬਿਸਮਾਦ ਦੇ ਕਹੀ ਵਿਸਮਾਦ ਜਾ ਸਕਦਾ ਵਿਸਮਾਦ ਅਵਸਥਾ ਦੀ ਪ੍ਰਾਪਤੀ ਕੁਦਰਤ ਹਰ ਪ੍ਰਭੂ ਵਸਤੇ ਜਿਉਂ ਕਰਣੀ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀਆਂ ਸਰਬ ਬੜੇ ਤੇਰੇ ਦਾਸ ਜਿਹੜੇ ਤੇਰੇ ਤੇਰੀ ਸ਼ਰਧ ਪਰੀ ਗਤ ਹੋਈ ਮੇਰੀ ਕਿ ਤੂੰ ਕਰੇਗਾ ਤੇਰੇ ਹੁਕਮ ਚ ਗਤ ਹੋਣੀ ਗਤੀਸ਼ੀ ਲੋਣੀ ਬੁੱਧੀ ਠੀਕ ਹੈ ਬੁੱਧੀ ਜਿੱਥੇ ਰੁਕੀ ਹੈ ਤੁਹਾਨੂੰ ਅੱਗੇ ਅੱਗੇ ਦੁਰਬੀਰ ਬੁੱਧੀ ਠੀਕ ਹੈ ਜਣਾਈ ਚੜਾਈ ਤੇ ਰੁਖੜਾਇਆ ਉਹ ਮੋਰਲੇ ਪਈ ਚੜਾਈ ਤੇ ਰੁਖੜੂ ਆਇਆ ਤਸਨ ਜਹਉਂਦੇ ਨਾ ਇਹ ਤਾਂ ਹੌਲੋ ਦਰਾਈ ਆਲੇ ਪਾਸੇ ਨੂੰ ਦੋ ਆਪੇ ਚੱਲ ਪੈ ਜੰਦੀ ਭਾਈ ਚੜਾਈ ਆਲੇ ਪਾਸੇ ਨੂੰ ਉਹ ਪਈਏ ਪਿੱਛੇ ਲੱਗੀ ਹੋਈ ਔਲਡ ਰੁੱਕਿਆ ਹੋਵੇ ਫੇਰ ਤਾਂ ਕੋਈ ਖਿੱਚ ਕੇ ਲਿਜਾਊਗਾ ਹਾਂ ਤਾਂ ਕਾਲ ਫੇਰ ਤਾਂ ਗੱਦੀ ਚਾਂਦੀ ਬਿਲੂ ਕੋਈ ਸਾਰਾ ਪਿੱਛੋਂ ਹੱਥ ਲਾਉਂ ਜਾ ਅੱਗੋਂ ਖਿੱਚੂ ਜਾ ਪਿੱਛੋਂ ਤਾਂ ਕੋਈ ਠੀਕ ਦਾ ਗਿਆਨ ਜਿਹੜਾ ਸ਼ਕਤੀ ਤੋਂ ਗਿਆਨ ਪਹਾੜ ਦੀ ਚੜਾਈ ਹੈ ਕੌਣ ਚੜਾ ਦੂਗਾ ਵਿਦਵਾਨ ਚੜ ਜਾ ਆ ਵਿਦਵਾਨ ਥਲੇ ਡੁਣਾ ਨੇ ਥੱਲੇ ਨੁਕੜ ਜੇਤੀ ਹੁੰਦੀ ਆ ਅਗੇ ਤਾਂ ਉੱਥੇ ਆ ਥੱਲੇ ਇਹ ਤਾਂ ਪਰਲੇ ਨੀ ਔਖੇ ਨੇ ਪਰਲੇ ਨੀ ਔਖੇ ਨਾਲ ਛੱਡੋ ਪਰੇ ਹੁਣ ਰੁਕੀ ਕਰਨ ਅਗਲੇ ਜਨਮ ਤੋਂ ਸਹੀ ਕੋਈ ਐਂਰੀਆ ਤੋਂ ਬਿਰਪੇ ਕੋਈ ਚੜਦਾ ਹੀ ਨਹੀਂ ਦਾ ਖਰਚਾ ਕਰਨਾ ਪਾਲ ਲੈ ਕੇ ਵੀ ਮਿੱਟੀ ਚ ਦੱਬੇ ਨੂੰ ਦੱਬੇ ਲਵਾਇਆ ਜਾਂਦਾ ਵੇਚੀ ਤੇਰੇ ਹੱਥ ਨਿਧਾਨ ਭਾਵੈ ਦੇ ਹੋਏ ਦਇਆਲ ਹਰ ਸੇ ਲੈ ਦਾਸ ਤੇਰੇ ਜਿਹੜੇ ਤੇਰੀ ਸ਼ਾਲ ਪੈਂਦੇ ਕਿਉਂ ਨਾ ਉਹ ਆਪਣੇ ਮਾਦਰਬ ਨੂੰ ਪੈਂਦੇ ਤਰੀਕਾ ਤੋਂ ਹੀ ਬੇਰੀਆਂ ਖੜੇ ਮਰੀ ਗੱਦੀ ਨੂੰ ੱਤਲਾ ਲਾ ਥੋੜੇ ਚੜੇ ਅੱਗੇ ਦੀ ਗੱਲ ਬੁੱਧੀ ਅਗਲਾ ਗਿਆਨ ਦੀ ਮਿਲਦਾ ਹੈ ਇਕਨਾ ਆਟਾ ਅਗਲਾ ਇਕਨਾ ਰਹੀ ਲੋੜ ਇਕਨਾ ਨੂੰ ਰੋੜ ਬੜੀ ਨੂੰ ਅਗਲਾ ਆਟਾ ਬਈਆ ਆਟਾ ਕਾਲ ਸ਼ਾਲ ਪੈਂਦੇ ਨੇ ਆਹ ਉਹ ਮੰਦਪੇ ਬਣਦੇ ਨੇ ਗੁਰੂ ਨਹੀਂ ਬਣਦੇ ਜਿਹੜਾ ਦੁੱਧਤਾ ਬਣਦਾ ਉਹ ਅਗਰਾਟਾ ਮਿਲ ਜਾਂਦਾ ਜਿਹੜਾ ਗੁਰੂ ਬਣਦਾ ਉਹ ਹੋਰ ਨਹੀਂ ਮਿਲਦਾ ਉਹ ਫੇ ਖੀਚੜੀਓ ਖਾਂਦਾ ਖੂਬ ਖਾਣਾ ਅੰਮ੍ਰਿਤ ਲਾਉਣ ਉਹ ਬੇਦਰ ਦਾ ਲੋੜ ਨਹੀਂ ਦੀਵਿਆਦੇ ਸੀ ਲੋਹਣੋ ਨਹੀਂ ਪਾਇਆ ਨਹੀਂ ਪੋਣਾ ਨੇ ਸੀ ਚੂੜੋਂ ਨੇ ਰਹਾਣੇ ਸੀ ਬਾਕੀ ਜੋ ਕੋਈ ਦੇ ਦਿੱਤਾ ਜੇ ਨਾ ਤਾਂ ਸੱਚ ਸਿਆ ਸੱਚ ਸੀ ਉਹ ਜੀ ਗੱਲ ਕਰਦੀ ਨੂੰ ਆਣਾ ਹੈ ਹਾਂ ਠੀਕ ਸਵਾਲ ਰਾਉਣ ਵਾਤੇ ਰੋਂ ਪਾਈਦਾ ਐ ਠੀਕ ਹੈ ਤੇਰੇ ਹੱਥ ਨਿਧਾਨ ਭਾਵੈ ਜਿਸ ਨੂੰ ਹੋਏ ਦਿਆਲ ਹਰ ਨਾਮ ਤੇਰੇ ਹੱਥ ਨੇ ਦਾ ਹੰਨ ਨੇ ਦਾ ਹੰਨ ਕੁ ਜਾਨਾ ਸਾਰਾ ਤੇਰੇ ਹੱਥ ਵਿੱਚ ਐ ਬਸ ਤਿਸ ਦੇ ਇਹਨੂੰ ਚਾਹਵੇਂ ਦੇ ਦੇ ਇਹਨੂੰ ਵਰਦੀ ਦੇ ਦੇ ਮੈਨੂੰ ਨਾ ਦੋਵੇ ਹੱਥ 'ਚ ਤੇਰੇ ਐ ਨੂੰ ਦੇ ਦੋ ਨਾ ਦੋਵੇ ਕੁਪੂਛਣ ਵਾਲਾ ਇਹਦੀ ਕੋਈ ਅਪੀਲ ਨਹੀਂ ਐ ਅਪੀਲ ਬਣੀ ਐ ਕਿਤੇ ਕੋਈ ਦਲੀਲ ਨਹੀਂ ਕੋਈ ਵਕੀਲ ਨਹੀਂ ਕੋਈ ਅਪੀਲ ਨਹੀਂ ਕੁਛ ਨਹੀਂ ਇਹਦਾ ਉਹ ਦੰਦਾ ਜ਼ਰੂਰ ਹੈ ਉਹ ਦੰਦਾ ਬਿਨਾ ਪੁਗੇ ਤੇ ਹੈ ਬਿਨਾ ਪੁਗੇ ਤੇ ਪਰ ਅਧਿਕਾਰੀ ਹੋਵੇ ਦੰਦਾ ਤਾਂ ਬਿਨਾ ਤੇ ਪਰ ਅਧਿਕਾਰੀ ਹੋਵੇ ਕੋਈ ਦੇਖ ਲੈ ਉੱਥੇ ਤਰੂ ਅਧਿਕਾਰੀ ਦੇ ਬਿਨਾ ਦੰਦਾ ਹੀ ਪੁਗੀ ਜਾਵੇ ਪੁਗੀ ਜਾਵੇ ਨਾ ਦੇ ਕੋសារੇ ਪਾਕਿਸਤਾਨ ਦੇ ਕੋសារਿਆਂ ਸੇਵਲਾਨ ਜਾਂਦੇ ਨੇ ਬਤਾ ਗਿਰਨੀ ਇੱਥੇ ਦੀ ਜਿਹੜੀ ਵੇ ਸੋਧੇ ਬਸ ਨਹੀਂ ਹੋਈ ਉੱਥੇ ਉੱਥੇ ਆਲੀ ਬੰਦ ਕਰ ਦੋਗੇ ਜੇਵਾ ਮੰਗਦੇ ਆਵੋ ਗੋਲ ਕਮਾ ਬਤੀਓ ਲੈਣ ਗੋਲ ਦੇ ਦੇਣਾ ਸੇਵਾ ਦੇ ਕੀ ਲੈਣ ਜਿਹਦਾ ਦੇਦ ਗੋਲ ਦੇਦ ਠੀਕ ਹੈ ਜੀ ਭਾਈ ਸੇਵਾ ਸੀ ਆਪੇ ਕਰ ਲਾਂਗੇ ਨਾ ਆਪੇ ਚਲਾ ਲਾ ਕੇ ਅੰਦਰ ਜਿਹੜਾ ਵਤੂ ਢਿਲਾ ਜੇ ਕਰੋ ਤਰਾਜੀ ਦੇ ਜਿਹੜਾ ਲੈਣਗੇ ਜਿਸ ਨੂੰ ਹੋਵੇ ਦਿਆਲ ਹਰਨਾਮ ਇਹਦੇ ਤੇ ਤੇਰੀ ਕਿਰਪਾ ਹੋਵੇ ਹਾਲਾਮ ਹੋ ਲੈਦੇ ਜੀ ਨਹੀਂ ਦੇਈ ਨੀ ਦੂਏ ਜੂ ਹਾਲਾਮ ਵੀ ਲੈ ਲੈਂਦੇ ਇਹਦੇ ਤੇਰੀ ਕਿਰਪਾ ਹਾਲਾਮ ਹੋ ਲੈਦੇ ਜੀ ਜਿਹੜੇ ਹਾਲਾਮ ਲੈਦੇ ਨੇ ਉਹ ਇਹ ਮਨ ਰਹਿ ਇਹੀ ਕਿਰਪਾ ਹੁੰਦੀ ਹੈ ਜਿਹੜੇ ਹਾਲਾਮ ਨਹੀਂ ਲੈਂਦੇ ਉਹ ਕਿਰਪਾ ਹੁੰਦੀ ਹੋਈ ਨਹੀਂ ਕਿਰਪਾ ਯਹੀ ਹੈ ਹੋਰ ਹੁੰਦੀ ਕਿਰਪਾ ਕੋਈ ਫੇਰ ਵੀ ਉਹ ਗਣਾ ਗੱਲ ਤੇ ਕਿਰਪਾ ਨਹੀਂ ਛੱਡਦੇ ਕਿਰਪਾ ਕਮਲੇ ਰਹੋ ਗੱਲ ਦਾ ਹਾਲਾਵਲ ਦਾ ਨਿੜੇ ਲੈ ਰਹੇ ਨੇ ਕਿਰਪਾ ਇੱਥੇ ਤੱਕੇ ਸੀਮਤ ਹੈ ਤੋਂ ਕਹਾ ਕਿਰਪਾ ਕੋਈ ਸੀਮਤ ਨਹੀਂ ਹੈ। ਸੱਸ ਸੀਮਾ ਕਿਰਪਾ ਦੀ ਸੀਮਾ ਬੰਦ ਸੀ। ਯਾਦ ਹੈ ਤੇਰੀ ਕਿਰਪਾ ਹਾਮ ਨਰਨਦਰ। ਅਗਰ ਬੰਦਾ ਗਿਆਨ ਲੈ ਲੈਂਦੇ ਨਹੀਂ ਹੋਰ ਮਾਤਰੂ ਮੰਨ ਲੈਂਦੇ ਨੇ ਇਹਦੇ ਇਲਾਵਾ ਕੋਈ ਕਿਰਪਾ ਨਹੀਂ। ਕਿਰਪਾ ਜਿਉਂ ਤੁਸੀਂ ਮੰਨਦੇ ਹੋ ਸਰਾਫ ਹੋ ਸਕਦਾ। ਜਿਉਂ ਇਹਦੇ ਇਲਾਵਾ ਕਿਰਪਾ ਮੰਨਦੇ ਹੋ ਸਕਦਾ ਸਰਾਫ ਹੋ ਗਏ ਹੋ। ਠੀਕ ਹੈ ਜੀ। ਆਹੋ ਹਾਂਜੀ ਆਗਮ ਅਗੋਚਰ ਬੇਅੰਤ ਅੰਤ ਨਾ ਪਾਈਐ ਜਿਸ ਨੂੰ ਹੋਏ ਕਿਰਪਾਲ ਸੋ ਨਾਮ ਧਿਆਈਐ। ਇਹਦਾ ਆਗਮ ਅਗੋਚਰ ਬੇਅੰਤ ਹੋਦਾ ਅੰਤ ਨਹੀਂ ਪਾਇਆ ਜਾਂਦਾ। ਬੇਅੰਤ ਕੀ ਕੋਣ। ਜੇ ਅੰਤ ਪਾਇਆ ਜਾ ਸਕਿਆ ਕਿਸੇ ਤੇ ਸਾਰਿਆਂ ਦੇ ਇਕੱਠੇ ਹੋ ਗਏ ਚਲੋ ਕੋਈ ਬੇਅੰਤ ਨਾਉ ਰੱਖ ਦੋ ਜੀ ਅੰਤ ਨਾਉ ਨਾ ਪਾਇਆ ਅੰਤ ਨਹੀਂ ਪਾਇਆ ਜਾਂਦਾ ਬੇਅੰਤ ਹੋ ਗਿਆ। ਵਿਸਨੂ ਹੋਏ ਕਿਰਪਾਲ ਸੋ ਨਾਮ ਤੇ ਆਈ ਹੈ ਜਿਤਨਾ ਹੋਏ ਦਰਪਾਲ ਸੋ ਨਾਮ ਤੇ ਆਈ ਹੈ ਨਾਮ ਦੇ ਵੀ ਜੀਦਾ ਧਿਆਨ ਉਹਦੇ ਤੇ ਤੇਰੀ ਕਿਰਪਾ ਜੁੜੀ ਵਾਰ ਫਿਰ ਹੋਈ ਗੱਲ ਗਿਆਨ ਲੈਣਾ ਗੁਰਬਾਣੀ ਦਾ ਉਦੋਂ ਫਿਰ ਵੱਡੀ ਕਿਰਪਾ ਜਿਹੜੀ ਹੈ ਦੇ ਨਾਲ ਜੁੜੀ ਹੋਈ ਪਹਿਲੀ ਕਿਰਪਾ ਗਿਆਨ ਨਾਲ ਜੁੜੀ ਹੋਈ ਹੈ ਦੂਜੀ ਕਿਰਪਾ ਧਿਆਨ ਨਾਲ ਜੁੜੀ ਹੈ ਅਗਲੀ ਕਿਰਪਾ ਨਾਲ 2000 ਤੋਂ ਮਿਲਦੇ ਨੇ ਉਹ ਵੀ ਕਿਪਈ ਹੈ ਅਗਲੀ ਕਿਰਪਾ 3000 ਜੁੜੀ ਹੋਈ ਹੈ 2000 ਤੋਂ ਉਹਨਾਂ ਨੂੰ ਕੋਈ ਨਹੀਂ ਉਹਨਾਂ ਨੂੰ ਜਨਪਦਾਰਕ ਦਿੱਤਾ 10000 ਜਨਪਦਾਰਕ ਤੋਂ ਜਨਪਦਾਰਕ ਤੋਂ ਧਿਆਨ ਨਾਲ ਧਿਆਈ ਜਾਓ ਜੀ